जो महला पहला कल होई कुत्ते मुही खाज हुआ मुर्दार कूड़ बोल बोल भोंकना चूका धर्म विचार कल होई कुत्ते मुही और तेरा कल्पना लग गया तू उपदेश कर धर्म का और कुत्ते मुही होगी पे तेरी ये कल्पना ऊ ਆਦਰੇ ਨਾ ਪਰੋ ਕਾਲੋ ਹੀ ਕੁੱਤੇ ਮਹੀ ਖਾਜ ਕੀ ਹੈ ਜੋ ਦੇ ਰਿਹਾ ਲੋਕਾਂ ਨੂੰ ਖਾਣ ਨੂੰ ਗਿਆਨ ਦੇ ਰਿਹਾ ਖਾਜ ਹੋਆ ਗੁਰਦਾਰ ਆਇਆ ਲਾਲਚ ਉਹ ਬਲੂਗਾ ਉਹ ਬਲੂਗਾ ਕੰਪਿਊਟਰ ਚਾਲ ਕਿਤੇ ਡੀਟੀ ਚਾਰ ਹੋ ਜਾਣਗੀਆਂ ਫੈਕਟਰੀਆਂ ਦਾ ਹੋ ਜਾਣਗੀਆਂ ਆ ਮਰਦਾਰ ਦੇ ਰਿਹਾ ਸਰੀਰ ਦਾ ਖਾਣਾ ਦੇ ਰਿਹਾ ਖਾਜ ਮਰਦਾਰ ਦਾ ਖਾਣ ਖਰਾਕ ਦੇ ਰਿਹਾ ਬਾਹਲੇ ਸ਼ਰੀਰ ਦੀ। ਅੰਦਰ ਦੇ ਵੀ ਕੋਈ ਸ਼ਰੀਰ ਨਹੀਂ ਆਤਮਾ ਦੀ ਖਰਾਕ ਕੋਈ ਨਹੀਂ ਦੇ ਰਿਹਾ। ਉਹ ਗੁਰਦਾਸ ਦੀ ਖਰਾਕ ਐ ਸਾਜੀ। ਖਾਜੋ ਆ ਗੁਰਦਾਸ। ਠੀਕ ਹੈ ਜੀ। ਕੂਡ ਬੋਲ ਬੋਲ ਭੌਂਕੜਾ ਚੂਕਾ ਧਰਮ ਵਿਚਾਰ। ਤੁਸੀਂ ਬਹੁਤ ਕਰਦੇ ਜੇ ਹੁਣ ਨਾਲ ਜਿਆਦਾ ਵੇਰਵਾ ਬਿਸਾਰ ਕਰਤਾ ਹੌਲੀ ਹੌਲੀ ਕਰ ਦਿੰਦੇ। ਹਾਂਜੀ। ਕੂਡ ਬੋਲ ਬੋਲ ਭੌਂਕੜਾ। ਆੜਾ ਕੂਡ ਬੋਲਦੇ ਨਾ ਝੂਠ ਬੋਲਦੇ ਨਾ। ਅਲ ਜਿਹੜਾ ਅੰਦਰ ਸਰੋ ਦਾ ਉਹਨੂੰ ਲਾਤਾ ਉਹਨੂੰ ਲਾਤਾ ਭੁੰਕੇ ਉਹਨਾਂ ਨੇ ਝੂਠ ਬੋਲਿਆ ਧਰਮ ਵਿਚਾਰ ਚੁੱਕ ਗਿਆ ਧਰਮ ਵਿਚਾਰ ਕੀ ਚੁੱਕ ਗਿਆ ਸਰੂਪ ਵਿਚਾਰ ਇਹ ਚੁੱਕ ਗਿਆ ਬਾਦਸ਼ਾਹ ਐਸੀ ਕਿਉਂ ਹੋਈ ਓਏ ਕਿ ਲਕੀਆ ਜੀ ਨਾ ਕੋਈ ਜਿਸ ਨਾ ਕੀਤਾ ਕੋਈ ਜਿਉਂਦਾ ਨਹੀਂ ਹੋ ਸਕਦਾ ਇਹ ਤਾਂ ਧਰਮ ਵਿਚਾਰ ਸੀ ਇਹਨੂੰ ਛੱਡ ਕੇ ਉਹਦਾ ਸਰੂ ਨੂੰ ਲਾਤਾ ਉਹਦਾ ਉਹਨੂੰ ਲਾਤਾ ਸਾਰਾ ਝੂਠ ਬੋਲਿਆ ਸੀ ਉਹ ਸੈਡ ਨੂੰ ਭੋਕਣਾ ਕਿ ਆ ਪਹਿਲਾਂ ਕੁਝ ਹੋਰ ਕਰਦੇ ਹੋਣੇ ਪਿੱਛੋਂ ਕਿਹੜਾ ਹਟ ਗਏ ਹਟੇ ਪਿੱਛੋਂ ਬਣੇ ਜੇ ਇਹ ਕਹੀਏ ਕੱਢਣ ਨੂੰ ਤਿਆਰ ਵੀ ਆਈ ਸਾਡੇ ਕੋਲ ਕਿਹਦੀ ਗੁਰਪਾਣੀ ਯਾਰਕੇ ਕਰੀਏ ਤੇ ਗੁਰਪਾਣੀ ਕਹਿੰਦੀ ਆਪਸਾ ਕੀਤਾ ਯਾ ਵੀ ਉਹ ਤੁਸੀਂ ਆਏ ਪੰਕਤੀਆਂ ਦੇ ਬਾਅਦ ਇਹ ਕਿਉਂ ਕੀਤਾ ਉਹਦੇ ਸਾਨੂੰ ਤਾਂ ਆ ਠੀਕਾ ਹਦਾਇਤ ਸੀ ਕਿ ਹਦਾਇਤ ਦੇ باوجود ਹੀ ਕਦੋਂ ਕਿਉਂ ਕੀਤਾ ਹੋ ਇਹਦਾ ਮਤਲਬਾ ਗੁਰਮਤਿ ਦੇ ਖਿਲਾਫ ਤੇ ਤੁਸੀਂ ਲੋਕ ਗਰ उल्टेरा ਮੋਲਟੇਰਾ ਭਾਇ ਤੁਸੀਂ ਇਹ ਜਾਣ ਬੁੱਝ ਕੇ ਜੀ ਜਿਨ ਜੀਵ ਤੇ ਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਉਹ ਜਿਹਨਾਂ ਦੀ ਜਿਉਂਦਿਆਂ ਦੀ ਪਰਖ ਨਹੀਂ ਹੋਏਗੀ ਹੋਈ ने ਦੀ ਜਿਉਂਦਿਆਂ ਦੀ ਗੱਲ ਨੂੰ ਸਾਰਿਆਂ ਨੇ ਪਰਵਾਹ ਨਹੀਂ ਕੀਤਾ ਜਵਾਬ ਨਹੀਂ ਜੀਉਂਦਾ ਲੋਕਾ ਸੱਚ ਦਾ ਜਵਾਬ ਹੁੰਦਾ ਹੀ ਨਹੀਂ ਬੋਇਆ ਬੰਦੀ ਸੋਏ ਬੋਇਆ ਨਹੀਂ ਤਾਂ ਜੀਵਨਾਂ ਦੇ ਤਾਂ ਚੱਲ ਪੱਤ ਹੁੰਦੀ ਆ ਕੁਝ ਲੋਕ ਕਰਦੇ ਹੁੰਦੇ ਨੇ ਜਿਉਂਦਿਆਂ ਨਹੀਂ ਤਾਂ ਪੱਤ ਬੁੱਧੀ ਹੋ ਜਾਂਦੀ ਹੈ ਬੰਦ ਪੈ ਜਾਂਦੀ ਹੈ ਖਤਮੇ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਬੰਦ ਬੁੱਧੀ ਵਾਲੀ ਸੀ ਐਵੇਂ ਚਲੀ ਜਾਂਦੀ ਹੈ ਭੋ ਦੇ ਪਾਏ ਉਹ ਗੱਲਾਂ ਉਹਦੇ ਪਾਸ ਚਲੀ ਜਾਂਦੀਆਂ ਨੇ ਸਹੀ ਹੁੰਦੀ ਆ ਜਾਣੇ ਬੜੇ ਬੜੇ ਦੇਖੇ ਉਹ ਗ੍ਰੰਥ ਬੜਾ ਬੜਾ ਜੋਰ ਲਾ ਕੇ ਪ੍ਰਚਾਰ ਕੀਤਾ ਹੋਇਆ ਉਹ ਰਿਓ ਦੇ ਭਾਅ ਚ ਲਿਆ ਜਾਂਦਾ। ਚੋੜਨਾ ਰਿਓ ਦੇ ਭਾਅ ਕੀ ਜਾਂਦਾ। ਜੀ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਈ। ਜੇ ਹੋਵੇ ਨਾਨਕਾ ਉਹ ਨਾਨਕਾ ਉਹਦਾ ਲਿਖਿਆ ਹੀ ਹੁੰਦਾ। ਤਰੋਂ ਲਿਖਿਆ ਪਰਵਾਨਾ ਫਿਰੇ ਨਹੀਂ। ਜੇ ਦਰਗਾਹੋਂ ਲਿਖਿਆ ਗਿਆ ਉਹੀ ਹੋਊਗਾ। ਕਰਤਾ ਕਰੇ ਸੋ ਕਰਤਾ ਕਰਦਾ ਉਹੀ ਹੁੰਦਾ। जो ना हुकम करता हो ही होगा कोई टाड़ सकता है जी मोहल्ला पहला रन्ना होइयां बोधियां पुरुष होए सयाद सील संजम सुच भन्नी खाना खाज आहज और सारे स्त्री क्षत्रिया जरे कर्तव्य है चरित्र दा मूल है ऐतो क्षत्रिया जरूरी है ਰੰਗਾਂ ਹੋਈਆਂ ਬੋਧੀਆਂ ਔਰਤਾਂ ਬੁੱਧਵਾਨ ਬਣ ਗਈਆਂ ਆਦਮੀਆਂ ਨੇ ਉਹ ਵੀ ਲੀਡਰ ਬਣ ਗਈਆਂ ਚਰਮ ਪ੍ਰਚਾਰ ਦੀ ਆਗੂ ਬਣ ਗਈਆਂ ਬੁੱਧਵਾਨ ਕਹਣ ਲੱਗੀਆਂ ਪੁੱਛ ਹੋਏ ਤਿਆਰ ਪੁਰਸ਼ ਕੀ ਹੋਗੇ ਕੋ ਕਰਮੀ ਹੋਗੇ ਜਿਹੜੇ ਨਾਰ ਪੁਰਸ਼ ਨੇ ਕੋ ਕਰਮੀ ਨਹੀਂ ਹੈ ਜਾਈ ਪੋਛ ਦੇਖੀ ਲੋ ਉਹ ਬੇਚੈਰੀ ਹੋਗੇ ਪੁਰਸ਼ ਟੀਲ ਸੰਜਮ ਸੋਚਪੱਤੀ ਤਾਂ ਹੀ ਤਾਂ ਟੀਲ ਸੰਜਮ ਸੋਚਿਆਰੇ ਭੱਜ ਦਿੱਤੀਆਂ ਤੋੜਟੀਆਂ ਕੋ ਕਰਮੀਆਂ ਨੇ ਤੋੜਟੀਆਂ ਸੀ ਖਾਣਾ ਖਾਜ ਅਹਾਜ ਉਪਦੇਸ਼ ਦੇ ਰਹੇ ਨੇ ਆਤਮਨ ਵੀ ਖਰਾਕ ਦੇ ਰਹੇ ਨੇ ਖਾਣ ਆਹਾਜ ਹਜ਼ਮ ਹੋਣ ਵਾਲੀ ਗੱਲ ਹੀ ਨਹੀਂ ਚੀਜ਼ ਇਹਦੀ ਕੋਈ ਦੇ ਰਹੇ ਉਹਨਾਂ ਦੀ ਕਹੀ ਗੱਲ ਤਾਂ ਹਜ਼ਮੇ ਦੀ ਹੁੰਦੀ ਸਿਆਣਿਆਂ ਦੇ ਉਹ ਤਾਂ ਆਹਾਜ ਹੈ ਜੋ ਉਪਦੇਸ਼ ਰਹੇ ਨੇ ਉਹ ਆਹਾਜ ਹੈ ਹਜ਼ਮ ਹੋਣ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਉਸ ਸਮੇਂ ਇਸ ਤਰ੍ਹਾਂ ਦੀ ਗੱਲ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਰੰਨਾ ਇਸ ਤਰ੍ਹਾਂ ਕਰਦੀਆਂ ਸੀ ਉਹ ਜੀ ਉਹ ਉਸ ਵੇਲੇ ਦੀ ਗੱਲਾਂ ਨੇ ਜਿਹੜੀਆਂ ਲਿਖੀਆਂ ਨੇ ਉਸ ਵੇਲੇ ਦੇ ਪਹਿਲੇ ਲਿਖੇ ਹੋਏ ਨੇ ਜਿਹੜੇ ਸ੍ਰੀ ਅਚਲਤਨ ਦੇ ਪਹਿਲਾਂ ਕਿਤੇ ਹੀ ਕੁਤਰੀ ਅਚਲਤਨ ਜਿਆ ਹੈ ਅਚਲਤਨ ਬਾਕੀ ਲਿਖੇ ਨੇ ਤਾਂ ਪ੍ਰਾਣੇ ਲਿਖੇ ਹੋਏ ਨੇ ਕਿ ਅੱਗਾਂ ਕਰ ਅਚਲਤਨ ਠੀਕ ਹੈ ਜੀ ਸ਼ੱਕ ਪੈਂਦੀ ਹੈ ਕੁਝ ਨੂੰ ਕਿ ਸ਼ਾਇਦ ਧਰਮ ਦੇ ਵਿੱਚ ਮਿਲਾਵਟ ਹੈ ਪਰ ਇਹ ਧਰਮ ਦਾ ਹਿੱਸਾ ਹੈ ਤੁਸੀਂ ਕੋਈ ਤਾਂ ਤੁਸੀਂ ਘਰਾੜ ਦੱਸੋਗੇ ਨਹੀਂ ਤੁਹਾਨੂੰ ਦੀ ਬਜੂ ਕੌਣ ਪਣਾ ਆਪਾਂ ਜਾ ਰਹੇ ਆ ਘਟ ਘਾਟੀ ਜਿਹੜੇ ਘਰ ਖੱਡ ਵੀ ਹੁੰਦੀ ਓਧੂ ਦੇ ਪਾਸੇ ਪਾਸੇ ਪਹਾੜ ਹੈ ਤੇ ਘਾਟ ਵਾਲੇ ਤੁਸੀਂ ਚੌਕਸ ਨਹੀਂ ਰੱਖੋ ਮੇਰੇ ਘਰ ਜਿੱਦੂਗਾ ਹੱਟਦਾ ਹੀ ਧਿਆਨ ਚਾਦਾ ਰੱਖਣ ਜੇ ਤੁਸੀਂ ਪ੍ਰਿਆਸ਼ ਚਰਸਤ ਦਾ ਮੁਖਿਆਨ ਥਾਂ ਜਾਂਦਾ ਪਬਲਿਕ ਦੇ ਵਿੱਚ ਦੁਕਾਨਾਂ ਚੱਲਦੀਆਂ ਹੀ ਇਹਨਾਂ ਦੀ ਨਾਲ ਆ ਤਾਂ ਵੀੜੀਆ ਵਾਲੇ ਘਟ ਘਾਣ ਲੈ ਨੇ ਤਾਂ ਗੱਲ ਬੰਦ ਹੁੰਦੀ ਓਲੇ ਹਾਂਜੀ ਇੱਕ ਬੜੇ ਮਾਨੇ ਪ੍ਰਮੰਨੇ ਪ੍ਰਚਾਰਕ ਨੂੰ ਅੱਜ ਜੇਲ ਦਾ ਹੁਕਮ ਹੋਇਆ ਅਮਰੀਕਾ ਵਿੱਚ ਐਸੇ ਕਾਰਨ ਕਰਕੇ ਅਸੀਂ ਤਾਂ ਕਮੀਆਂ ਦੇ ਨਜ਼ਰ ਖੜੀਆਂ ਆ ਫੜੀ ਉਹ ਤੇ ਕਮੀਆਂ ਨੇ ਸਾਨੂੰ ਥੱਲੇ ਕਮੀਆਂ ਤੋਂ ਹੀ ਖਤਰਾ ਸਾਨੂੰ ਗੁਨਾਹ ਤਾਂ ਕੋਈ ਖਤਰਾ ਨਹੀਂ ਹੈ ਤੋਂ ਖਤਰਾ ਹੈ ਜਿਹੜੀ ਜੀ ਤੋਂ ਖਤਰਾ ਧਿਆਨੋਚ ਰੱਖਣ ਦਾ ਕੋ ਧਿਆਨ ਖਤਰਾ ਨਹੀਂ ਹੋ ਜੇ ਅਖਲ ਤੇਆ ਸ਼ਰਮ ਗਿਆ ਘਰ ਆਪਣਾ ਪੱਤ ਉੱਠੀ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਸ਼ਰਮਤਾ ਆਪਣੇ ਘਰ ਚਲੀ ਗਈ ਜਿਹੜੇ ਸ਼ਰਮ ਵਾਲੇ ਲੋਕ ਹੁੰਦੇ ਨੇ ਉਹ ਤਾਂ ਸੱਜਣ ਚਲੀ ਗਈ ਸ਼ਰਮ ਕਰਦੇ ਜ ਲੋਕੀ की ਕੇ ਵਿਚਾਰੀ ਉਹ ਨਹੀਂ ਬਾਹਰ ਆਉਦੀ ਕਿਉਂਕਿ ਈ ਸ਼ਰਮ ਦਾ ਨੀ ਕਾਪਨ ਸ਼ਰਮ ਤਾਂ ਦਰਜਾ ਲੁਕੀ ਇੱਜ਼ਤ ਵਿੱਚ ਜੀ ਗੱਲ ਖਾਲਣਾ ਰਹਾ ਲਾਤੀ ਨਾਲ ਸੀ ਲੋਈ ਕੀ ਕਰੂ ਕੋਈ ਨਾ ਲਾਤੀ ਲੋਈ ਉਹ ਨਾਲ ਸੀ ਉੱਠ ਚੱਲੀ ਨਾਲ ਪਤਮੀ ਨਾਲ ਚਲੀ ਗਈ ਕੋਈ ਪਤਮੀ ਪ੍ਰਵਾਹ ਨਹੀਂ ਹੈ ਸੱਚਾ ਇੱਕ ਹੈ ਆਪ ਸੱਚਾ ਪਾੜ ਨਾਨਕਾ ਇਹ ਇਕਾਣ ਜਿੱਤੜ ਕਰਕੇ ਅਡੋਲ ਹੈ ਤੇ ਕਮਲ ਦੀ ਚਿੱਤ ਹੈ ਸੱਚਾ ਜਿਹੜਾ ਜੋ ਦੁਬਧਾ ਵਿੱਚ ਹੈ ਹੋਰ ਜੋ ਸੱਚਾ ਪਾਲਣ ਦੀ ਲੋੜੀਓ ਸੱਚਾ ਸੁਧਾਈ ਦੀ ਜਿਹੜਾ ਇੱਕ ਹੋ ਗਿਆ ਉਹ ਸੱਚਾ ਹੈ ਜਿਹੜਾ ਇੱਕ ਰੰਗ ਢੋਲ ਸੱਚ ਤਰ੍ਹਾਂ ਦਾ ਉਹ ਸੱਚਾ ਹੈ ਹੋਰ ਸੱਚਾ ਕਿ ਤੋਂ ਪਾਲਣ ਦੀ ਲੋੜੀ ਬਸ ਉਹ ਹੀ ਸ਼ਰਮ ਨਾਲ ਗਿਆ ਸ਼ਰਮ ਕੋਈ ਪੁਰਸ਼ਵਾਚਕ ਕੇ ਸ਼ਬਦ ਹੈ ਜੀ ਔਂਕੜ ਹੈ ਸ਼ਰਮ ਗਿਆ ਲਿਖਿਆ ਸ਼ਰਮ ਗਿਆ ਕਰ ਆਪਣੇ ਭਗਵਾਨ ਆਤਮਾ ਦੇ ਦੁਨਿਆਖਾਰੀ ਦੁਨੀਆਂ ਦੇ ਇਹ ਭਰਬ ਦੇ ਦੂ ਵੀ ਇਦਾਂ ਹੀ ਲੱਗਿਆ ਹੋਇਆ ਦੋਹਾਂ ਰੂਪਾਂ ਚ ਨਹੀਂ ਇਹ ਸ਼ਰਮਤਾ ਨਹੀਂ ਹੈ ਜਿਹੜਾ ਸ਼ਰਮ ਮਿਹਨਤ ਹਾਂਜੀ ਨਹੀਂ ਨਹੀਂ ਉਹ ਵੀ ਇਦਾਂ ਨਾਲ ਸ਼ਰਮ ਗਿਆ ਨਹੀਂ ਨਹੀਂ ਨਹੀਂ ਗੱਲ ਨਹੀਂ ਹੈ ਸ਼ਰਮ ਚਲੀ ਗਈ ਨਾਲ ਹੈਆ ਵੀ ਚਲੀ ਗਈ ਕਿਤੇ ਵੀ ਚਲੀ ਗਈ ਕਿਉਂਕਿ ਇਹ ਅੱਖਰ ਸੱਤਵਾਂ ਆਉਂਦਾ ਮਨਦਾ ਸੰਤੋਖ ਸ਼ਰਮਪਤ ਝੋਲੀ ਉੱਥੇ ਹੀ ਦਾ ਅਰਥ ਲੱਗ ਗਿਆ ਜੀ ਸ਼ਰਮਪਤ ਦੋਈ ਜਿੱਤਾ ਗੱਡੀਆਂ ਦੇ ਸ਼ਰਮ ਕਹਾਂਗੇ ਕਿ ਸ਼ਰਮ ਕਹਾਂਗੇ ਦੇਖੋ ਬਾਹਰ ਮੁੱਖੀ ਜਿਹੜੇ ਬਣਾਉਗੇ ਸਭ ਉੱਦਾ ਸੰਤੋਖ ਜਸ ਸੁਤੋਖ ਨਹੀਂ ਮੁੱਦਰਾ ਫਿਰ ਉਸੇ ਪੱਤਾ ਅਗੇ ਤੇ ਖਾ ਲੈਣ ਪਹਿਲਾਂ ਹੱਥ ਤੇ ਖਾਣ ਦੇ ਪੱਤੇ ਤੇ ਪਾ ਲੈਣ ਹੋ ਗੀ ਫੇ ਛੋੜੀ ਲੈਣ ਲੱਗੇ ਜੇ ਤਾਂ ਮੁੱਦਾ ਸੰਤੋਖ ਦੀਆਂ ਪੌੜੀਆਂ ਦੇ ਫਿਰ ਪੱਤਾ ਲੈਣਾ ਚਾਹੇ ਝੋੜੀ ਲੈਣੀਏ ਫਿਰ ਤੁਹਾਨੂੰ ਆਪਣੀ ਵੇਰਤ ਉਹਦੇ ਤੇ ਪਾਉਣੀ ਚਾਹੀਦਾ ਵੇਰਤ ਕਰਕੇ ਪੱਤੇ ਦੇ ਪਾਸੇ ਉਹ ਵੇਰਤ ਕਰਕੇ ਝੋੜੀ ਲੋ ਇੱਕ ਤਾਂ ਇਹ ਅਰਥ ਹੈ ਫਿਰ ਇਹ ਸ਼ਰਮਰਪਤ ਦੀ ਝੋੜੀ ਬਣਾਓ ਝੋੜੀ ਜੇ ਖਾਲੀ ਰਹੇਗੀ ਸ਼ਰਮਰਪਤ ਪਾਤੇ ਜੜਤ ਝੋੜੀ ਚਾਹੀਦੀ ਹੈ ਜਿਤ ਸਲਦੀਆਂ ਜਿਤ ਕਬੂੜੀਆਂ ਦੁਨੀਆ ਵਿੱਚ ਸੰਤੋਖ ਤੋਂ ਬਿਨਾ ਇੱਜਲੀ ਕਮਾਈ ਹੋਣੀ ਨਹੀਂ ਝੋੜੀ ਖਾਲੀ ਰਹਿ ਜੂ ਇਹਰ ਠੀਕ। ਅੱਛਾ ਦੂਸਰੀ ਜਗ੍ਹਾ ਆਉਂਦਾ ਜੀ ਭੈ ਵਿੱਚ ਖੁੰਭ ਚੜਾਈਏ ਸ਼ਰਮ ਪਾ ਤਨ ਹੋਏ। ਆਹ ਭੈ ਵਿੱਚ ਰਹੇ ਤਾਂ ਜਿਹੜਾ ਹੈ ਰੰਗ ਉੱਤਰ ਕੇ ਦਾਗ ਵੀ ਉੱਤਰ ਕੇ ਚਿੱਟਾ ਖੂਬਰਗਾ ਹੋ ਜਾਂਦਾ। ਪਰ ਇਹ ਸ਼ਰਮ ਹੈ ਇੱਥੇ ਸ਼ਰਮ ਹੈ ਕੀ ਹੈ ਸ਼ਰਮ ਹੈ ਕਿ ਸ਼ਰਮ ਹੈ। ਇਹ ਸਰੀਰਿਕ ਦੀ ਗੱਲ ਨਹੀਂ ਹੈ। ਸ਼ਬਦ ਵਿਚਾਰ ਦੀ ਗੱਲ ਹੈ। ਜਿਹਨੇ ਛੇਦਿਆ ਉਹ ਤੋਂ ਪੈਦਾ ਉਹ ਜੋ ਬੀਜਣਾ ਵੀ ਖਾਂਦਾ। ਠੀਕ ਹੈ ਇੱਥੇ ਵੀ ਫਿਰ ਸ਼ਰਮ ਦਾ ਮਤਲਬ ਸ਼ਬਦ ਵਿਚਾਰ ਹੀ ਹੈ। ਅਸਲ ਦੇ ਵਿੱਚ ਇੱਕ ਲਫ਼ਜ਼ ਦੇ ਸੱਲ ਗੋਹੀ ਉੱਦੇ ਨੇ। ਹਾਂਜੀ। ਅਰਥ ਪ੍ਰਕਾਰ ਦੇ ਹਿਸਾਬ ਨਾਲ ਦੋ ਹੋ ਜਾਂਦੇ ਨੇ। ਠੀਕ ਹੈ ਜੀ। ਪ੍ਰਕਾਰ ਨੇ ਅੱਛਾ ਗਿਆ ਇੱਥੇ ਸ਼ਰਮ ਦਾ ਮਤਲਬ ਫਿਰ ਉਹੀ ਹੋਏਗਾ ਸ਼ਬਦ ਵਿਚਾਰ ਘੱ ਗਏ ਦਾ ਕੁਝ ਨਹੀਂ ਫਰਕ ਪੈਂਦਾ। ਅੱਛਾ ਜੇ ਮੈਂ ਮਾਤਾ ਨੂੰ ਕਹਿੰਦਾ ਨਾ ਮੇਰਾ ਮਾਤਾ ਕਿ ਵਿਆਹ ਕਾਣ ਦੀ ਲੱਗਦੀ ਐ ਨਾ ਲੱਗਦੀ ਉਹ ਚੀਜ਼ਾਂ ਠੀਕ ਐ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ ਚਲ ਜਿਹੜਾ ਆਪਣੇ ਘਰ ਚਲਾ ਗਿਆ ਸ਼ਰਮ ਦਾ ਘਰ ਹੋਰ ਐ ਸ਼ਰਮ ਦਾ ਘਰ ਸੱਚ ਖੰਡਰ ਉਹ ਉਹ ਚਲਾ ਛੱਡ ਗਿਆ ਸ਼ਰਮ ਛੱਡ ਗਿਆ ਆਪਣੇ ਘਰ ਚਲਾ ਗਿਆ ਤੇ ਨਾਲ ਸ਼ਰਮ ਦੀ ਰਹਿੰਦੀ ਆਪਣੇ ਘਰ ਚਲੀ ਜਾਂਦੀ ਠੀਕ ਐ ਪਤ ਉੱਠ ਚੱਲੀ ਨਾਲ ਦਾ ਕੀ ਭਾਵ ਐ ਜੀ ਪਤ ਵੀ ਨਾਲ ਚਲੀ ਗਈ ਇੱਜ਼ਤ ਵੀ ਨਾਲ ਚਲੀ ਗਈ ਬੇਇੱਜ਼ਤੀ ਰਹੇਗੀ ਬੇਇੱਜ਼ਤ ਹੋਏ ਕਦੇ ਖਦਾਸ਼ ਰਹਿੰਗੀ ਅੱਛਾ ਜੀ ਇੱਜ਼ਤ ਵੀ ਚਲੀ ਗਈ ਸ਼ਰਮ ਵੀ ਚਲੀ ਗਈ ਤੁਹਾਨੂੰ ਕਿ ਸ਼ਰਮੀ ਔਰ ਬੇਇੱਜ਼ਤੀ ਹੋਏ ਰਹਗੀ ਔਰ ਬੇਇੱਜ਼ਤੀ ਦੇ ਕਾਰ ਇੱਜ਼ਤ ਔਰ ਸ਼ਰਮ ਵੀ ਰਹਿ ਸਕਦੀ ਠੀਕ ਹੈ ਜੀ ਵਿਰੋਧੀ ਨੇ ਨਾ ਹੋਰ ਜੀ ਬਾਹਰ ਪਸਮ ਲੇਪਨ ਕਰੇ ਅੰਤਰ ਗੁਵਾਰੀ ਖਿੰTHA ਝੋਲੀ ਬਹੁ ਭੇਕ ਕਰੇ ਦੁਰਮਤ ਅਹੰਕਾਰੀ ਬਾਹਰ ਪਰਮਾਤਮਾਲੇ ਪਰਦਾ ਚਿੱਟਾ ਹੋ ਜਾਂਦਾ ਕਰੇ ਅੰਦਰ ਗੁਬਾਰੀ ਮੰਨੇ ਅੰਦਰ ਗੁਬਾਰਾ ਹੈ ਉੱਥੇ ਕਰਨਾ ਚਾਹੁੰਦਾ ਉੱਥੇ ਕਰਕੇ ਕਰੇਗਾ ਉਹ ਤੇ ਨਹੀਂ ਹੋ ਸਕਦਾ ਬਾਹਰ ਤਾਂ ਕਰ ਲੇਗਾ ਚਲੋ ਸੋਸਾ ਮੜ ਕੇ ਚਿੱਟਾ ਹੋ ਜਾਏਗਾ ਅੰਦਰ ਗੁਬਾਰੀ ਅੰਦਰ ਗੁਬਾਰਾ ਹੈ ਢੇਰ ਗੁਬਾਰਾ ਹੈ ਚਿੱਟਾ ਵੀ ਹੈ ਝੋਲੀ ਵੀ ਹੈ ਉਹ ਵੀ ਕਰਦਾ ਦੁਰਮਤ ਅਹੰਕਾਰੀ ਦੁਰਮਤ ਲਈ ਵਰਦਾ ਮਤ ਕੀ ਹੈ ਦੂਰ ਕਰਨ ਵਾਲੀ ਹੈ ਸੱਚ ਆਪਣੇ ਦੂਰ ਤੋਂ ਤਕਾਰੀ ਹੈ ਹੁਕਮ ਦਾ ਦਾ ਵਿਰੋਧ ਕਰਦਾ ਹੈ ਹੁਕਮ ਦੇ ਦਾ ਖਿਲਾਫ ਖੜਾ ਹੈ ਤੇ ਦੁਰਮਤ ਤੇ ਕਰੂਗਾ ਸੱਚ ਤੋਂ ਤੁਨ ਇਹ ਸੱਚ ਤੋਂ ਦੂਰ ਲੈ ਕੇ ਜਾਊਗਾ ਸੱਚ ਤਾਂ ਡੇੜੇ ਨਹੀਂ ਜਾਣਦੇ ਨੇ ਹੋਜੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਪਰ ਮਹਿੰਗਾ ਸਾਹਿਬ ਸ਼ਬਦ ਨਾ ਉਚਰੈ ਸਾਹਿਬ ਦਾ ਸ਼ਬਦ ਜਿਹੜਾ ਤੁਰਕੀ ਬਾਣੀ ਹੈ ਉਦਾਰਨ ਨਹੀਂ ਕਰਦਾ ਮਾਇਆ ਮੋਹ ਪਸਾਰੀ ਮਾਇਆ ਮੋਹ ਦੇ ਪਸਾਰੇ ਵਿੱਚ ਫਸਿਆ ਫਿਰਦਾ ਮਾਇਆ ਮੋਹ ਦੇ ਪਸਾਰੇ ਦੀਆਂ ਗੱਲਾਂ ਕਰਦਾ ਲਾਲਚੀ ਬਣਦਾ ਫਿਰਦਾ ਲੋਕਾਂ ਨੂੰ ਇੱਦਣ ਕੀ ਹੈ ਲਾਲਚ ਹੈ ਭਰਮ ਹੈ ਸਭੀ ਭਰਮ ਵਿੱਚ ਭੁੱਲਿਆ ਫਿਰਦਾ ਭਰਮ ਦੇ ਵਿੱਚ ਪਜਿਆ ਫਰੀ ਜਾਂਦਾ ਹੈ ਲਾਲਚੀ ਅੰਦਰ ਭਰਮ ਵੀ ਅੰਦਰ ਉਹ ਭਰਮ ਕਾਹਦਾ ਹੈ ਗਿਆਨ ਹੋਵੇ ਤਾਂ ਭਰਮ ਕਿਉਂ ਹੋਵੇ ਕਵਾਰ ਹੈ ਪਸ਼ੂ ਹੈ ਬਣਿਆ ਫਿਰਦਾ ਹੈ ਗੁਰੂ ਹੈ ਪਸ਼ੂ ਕਿਆਂ ਤੇ ਸਖਣ ਉਦਲ ਢੇਰ ਲੈ ਢੇਰਾ ਲਈ ਫਿਰਦਾ ਹੈ ਬਣਿਆ ਫਿਰਦਾ ਕੋਈ ਲੋਕਾਂ ਨੂੰ ਕੀ ਜਾਣਦੇ ਨੇ ਤੇਰੇ ਆਪਣੇ ਉਦਲਤਾ ਹੈ ਜੀ ਠੀਕ ਹੈ ਜੀ ਜਿੰਨੇ ਆਪਣੇ ਪ੍ਰਚਾਰਕ ਹੈ ਪਰ ਮਹੰਗਾ ਵਾਰੀ ਉਹ ਕੋਈ ਪਰਮ ਨਹੀਂ ਕਿਸੇ ਦਾ ਨਿਵਾਰ ਸਕਦੇ ਜੋ ਸਿੱਖਿਆ ਉਹੀ ਬੋਲ ਸਕਦੇ ਬਸ ਉਸ ਤੋਂ ਬਾਹਰ ਨਹੀਂ ਦੇ ਵਿੱਚ ਦੇ ਅਨਸਾਰੇ ਅਰਥ ਆਏ ਇਹ ਸਾਰੇ ਯੂਨੀਵਰਸਿਟੀਾਂ ਨੇ ਠੀਕ ਹੈ ਜੀ ਨਾਨਕ ਨਾਮ ਨਾ ਚੇਤੇਈ ਜੂਏ ਬਾਜੀ ਹਾਰੀ ਹਨ ਕਹਨੇ ਜੇ ਨਾਮ ਨਾ ਚੇਤੇ ਆਂ ਤੀ ਚਟਕਾ ਦੀ ਲੱਗਿਆ ਵੀ ਨਾਮ ਕੀ ਕਹਿੰਦਾ ਗੁਰਬਾਣੀ ਕੀ ਕਹਦੀ ਹੈ ਜੂਏ ਬਾਜੀ ਹਰੀ ਤੈਨੂੰ ਕੋਈ ਫਰਕ ਪਿਆ ਜੋ ਬਾਣੀ ਕਹਦੀ ਹੈ ਗਾਇਲੀ ਰਹੇ ਤੂੰ ਆਪਣੇ ਮਾਸਟਰ ਮਾਇਆ ਦੇ ਵਿੱਚ ਇੱਥੇ ਜੂਏ ਬਾਜੀ ਹਰੀ ਗਈ ਤੇ ਕੈਨਬਦੀ ਬਾਜੀ ਹਰੀ ਗਈ ਮਤਲਬ ਪਿਆਰਿਆ ਕਿ ਚੱਲਿਆ ਜਵਾਰੀਆਂ ਤੋਂ ਮੈਂ ਹਟਿਆੜ ਕੇ ਵੀ ਤਿਆਰ ਹੋ ਜਾ ਠੀਕ ਹੈ ਜੀ ਇੱਥੇ 14ਵੀਂ ਪੌੜੀ ਦੀ ਸਮਾਪਤੀ ਹੈ ਜੀ